ਮੰਗ ਮੰਗੀ ਏ ਤੇ ਤੇਰੇ ਕੋਲੋਂ ਕੀ ਮੰਗੀ ਏ ਉਹ ਮੰਗ ਮੰਗੀ ਏ ਤਾਂ ਤੇਰੇ ਕੋਲੋਂ ਕੀ ਮੰਗੀ ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗੀਏ ਤੇਰੇ ਨਾਮ ਤੋਂ ਬਿਨਾ ਹੋਰ ਕੀ ंगीए ता तेरे कोलो siki mangiye osiki oh, mangiye, oh, mangiye siki mangiye o oh, tere ਰਾਦਣਾ ਹੀ ਰੱਲਾ ਮੇਰਾਦਣਾ ਤਿਆਗਨਾ ਤਿਆਗ ਨੀਕਾ ਕਾਮ ਕਰੋ ਤੇ ਲੋਭ ਤਿਆਗਨਾ ਤੇ ਮੰਗਣਾ ਮੰਗਣ ਨੀਕਾ ਹਰ ਕਿਸ ਤੇ ਮੰਗਣਾ ਤੇਰੇ ਕੋਲ ਕੀ ਮੰਗੀਏ ਉਹ Yeah ਖਕ ਪੇ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋਏ ਦਿਆਲ ਨਾਮ ਦੇ ਮੰਗਤ ਜਨ ਕੋ ਸਦਾ ਰਹੇ ਹਾਰੇ ਜਾਓ ਸਾਚੇ ਤੇਰੇ ਨਾਮ ਬਿਟੋ ਕਰਨ ਕਾਰਨ ਸਭ ਨਾ ਕਾਇਕੋ ਅਵਰ ਨਾ ਦੂਜਾ ਚੇਕਿਰਪਾ ਕੀ ਜੈ ਹੋ ਦਿਆਲ ਨਾਮ ਹੋਏ ਦਿਆਲ ਦਰਸ਼ਨ ਦੇ ਆਪਣਾ ਐਸੀ ਬਖਸ਼ ਕਰੀਏ ਪਰਸਾਦੀ ਜਾਣਿਆ ਸਾਚੀ ਲਵ ਲਾਗੀ ਹੈ ਪੀਤਰ ਸੰਗਤ ਜੀ ਨਾਮ ਇੱਕ ਇਹੋ ਜੀ ਚੀਜ਼ ਐ ਨਾਮ ਜਿਹਨਾਂ ਨੇ ਜਪ ਲਿਆ ਉਹਨਾਂ ਨੇ ਸਭ ਕੁਝ ਪਾ ਲਿਆ ਕਬੀਰ ਕਹਿੰਦੇ ਆ ਮਨ ਨਿਰਮਲ ਪਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਤ ਕਬੀਰ ਕਬੀਰ ਜਿਹਦੇ ਰੱਬ ਦੇ ਪਿੱਛੇ ਅਸੀਂ ਫਿਰਦੇ ਆ ਉਹ ਕਬੀਰ ਭਗਤ ਨੇ ਜਦੋਂ ਉਹਦਾ ਨਾਮ ਜਪਿਆ ਤੇ ਉਹਦੇ ਮਗਰ ਫਿਰਦਾ ਜਿਹੜੇ ਭਗਤ ਹਨ ਰੱਬ ਉਹਨਾਂ ਲਈ ਸਭ ਕੁਝ ਕਰਦਾ ਹੈ ਤਰਲੋਚਨ ਭਗਤ ਹੋਏ ਹੈਗੇ ਆ ਤਰਲੋਚਨ ਭਗਤ ਇੱਕ ਤੇ ਹੋਇਆ ਜਿਨ੍ਹਾਂ ਨੇ ਧੰਨੇ ਭਗਤ ਨੂੰ ਨਾ ਪੱਥਰ ਦਿੱਤਾ ਸੀ ਧੰਨਾ ਭਗਤ ਕਹਿੰਦਾ ਜ਼ਿਮੀਦਾਰ ਸੀ ਬਚਾਰਾ ਬੜਾ ਸਿੱਧਾ ਸੀ ਉਹ ਇੱਕ ਦਿਨ ਪੰਡਤ ਨੂੰ ਦੇਖਿਆ ਕਹਿੰਦਾ ਪੰਡਤਾ ਕਿੱਥੇ ਚੱਲੇ ਕਹਿੰਦਾ ਮੈਂ ਠਾਕਰਾਂ ਦੀ ਪੂਜਾ ਕਰਨ ਮਰਜ਼ੀ ਕਰਾ ਲਓ ਸਭ ਕੁਝ ਕਰਦੇ ਆ ਉਹ ਕਹਿੰਦਾ ਫੇ ਇਦਾਂ ਕਰੇ ਇੱਕ ਮੈਨੂੰ ਵੀ ਦੇ ਦੇਈ ਉਹ ਕਹਿੰਦਾ ਕਿ ਲੈ ਤੈਨੂੰ ਵੀ ਦੇ ਦਾਂਗਾ ਉਹ ਪੰਡਤ ਤਾਂ ਪੰਡਤ ਸੀ ਨਾ ਉਹਨ ਕਹਿੰਦਾ ਕਿ ਚੱਲ ਇਹਨੂੰ ਕੀ ਪਤਾ ਠਾਕਰ ਕੀ ਹੁੰਦਾ ਉਹ ਚੱਕ ਕੇ ਉਹਨੂੰ ਪੱਥਰ ਦਿੱਤਾ ਵੱਡਾ ਸਾਰਾ ਪੱਥਰ ਚੱਕਿਆ ਕਹਿੰਦਾ ਲੈ ਤੈਨੂੰ ਸਭ ਤੋਂ ਵੱਡਾ ਠਾਕਰ ਦੇਣਾ ਤੂੰ ਇਹਦੀ ਸੇਵਾ ਕਰੀ ਜੋ ਤੂੰ ਕਹੇਗਾ ਇਹ ਕਰੂਗਾ ਪਰ ਇਦਾਂ ਕਰੀ ਕਹਿੰਦਾ ਇਹਦੀ ਪੂਜਾ ਪਹਿਲਾਂ ਕੱਲ ਨੂੰ ਲੈ ਆਈ ਸਵੇਰੇ ਉਹਨ ਆਪਣੀ ਸਾਰੇਆਂ ਗਾਈਆਂ ਚ ਸੋਹਣੀ ਗਾਂ ਉਹਨੂੰ ਦੇ ਦਿੱਤੀ ਤੇ ਠਾਕਰ ਹੋਰੀ ਕਰ ਲਿਆ ਠਾਕਰਾਂ ਨੂੰ ਕਰ ਲਿਆ ਕਿ ਲੱਗੇ ਉਹਨਾਂ ਦੀ ਸੇਵਾ ਕਰਨ ਉਹਨਾਂ ਨੂੰ ਪੂਜਾ ਉਹਨਾਂ ਦੇ ਨੂੰ ਲਾਇਆ ਤਲਾਇਆ ਉਹਨਾਂ ਨੂੰ ਬਿਠਾਇਆ ਤਿਲਕ ਲਗਾਇਆ ਲਗਾ ਕੇ ਤੇ ਪ੍ਰਸ਼ਾਦ ਪਾਣੀ ਲਿਆ ਕੇ ਮੱਕੀ ਦੀਆਂ ਰੋਟੀਆਂ ਤੇ ਸਾਗ ਮਸਾ ਸੰਗਤ ਜੀ ਸਾਹਿਬ ਜੀ ਨੂੰ ਸਾਖੀ ਦੂਜੀ ਸੁਣਾਣੀ ਪਰ ਇਹਦਾ ਥੋੜਾ ਜਿਹਾ ਦੱਸ ਦਿੰਨੀ ਆ ਤੇ ਠਾਕੁਰਾ ਨੂੰ ਕਹੇ ਜੀ ਛਕੋ ਹੁਣ ਉਹ ਪੱਥਰ ਸੀ ਤੇ ਇਹ ਤੇ ਇਹਦਾ ਪ੍ਰੇਮ ਸੀ ਤੇ ਉਹ ਠਾਕਰ ਜੀ ਤੇ ਛਕਣ ਨਾਲ ਤੇ ਇਹ ਕਹਿੰਦਾ ਉਹਨੂੰ ਮਿਹਣੇ ਮਾਰਦਾ ਕਹਿੰਦਾ ਕਿ ਮੇਰੇ ਕੋਲ ਤਾਂ ਮੱਕੀ ਦੀ ਰੋਟੀ ਮਿਲਣੀ ਆ ਉਹ ਬ੍ਰਾਹਮਣ ਜਿਹੜੇ ਹੁੰਦੇ ਆ ਨਾ ਪੰਡਤ ਉਹਨਾਂ ਕੋਲ ਜ਼ਿਆਦਾ ਪਦਾਰਥ ਮਿਲਦੇ ਹੁੰਦੇ ਆ